ਸਾਗਰ ਸ੍ਰਿਸ਼ਟ ਕੋ ਰਾਜਾ ਦੁਭੀਆ ਹਰਕਾ ਨਾਮ ਜਬਤ ਹੋਏ ਸੁਪੀਆ ਪਹਿਲਾ ਤੋਹਨੇ ਕਿਹਾ ਜੇ ਵੀ ਸੁਤ ਪੀਏ ਜਿਹੜੇ ਬੰਦੇ ਪਦੇ ਨੇ ਨਾ ਫਿਰ ਇਹ ਆ ਏਡਾ ਹੋ ਗਿਆ ਚੈਬਰੀ ਬੜਦਾ ਉਹ ਵਗਿਆ ਰਾਜਾ ਹੀ ਹੋ ਗਿਆ ਚਲ بڑے ਲੱਬਰ ਵਲ ਫਿਰ ਰਾਜਾ ਲੈ ਲੈ ਹਮੇ ਕਿਧੀਆਂ ਦਸਤੇ ਜਾਂ ਆਪਾਂ ਇਥੇ ਤੜੀਆਂ ਜਿੱਦਾ ਰਾਜਾ ਲੈ ਗਿਆ ਰਾਜਾ ਵੀ ਸਗਲ ਸੇ ਕੋਈ ਲੈ ਗਿਆ ਪਰ ਜੇ ਹੁਣ ਪਧਣੇ ਲੱਗ ਗਿਆ ਮਾਇਆ ਵਾਲ ਨੂੰ ਬੜਾ ਯੋਣ ਲੱਗ ਗਿਆ ਚਲ ਸਿਰਸ ਤੇ ਰਾਜੇ ਦੀ ਗੱਲ ਕਰੀ ਇੱਕੋ ਵਾਰ ਤਦ ਵੱਡੀ ਹੈ ਜੇ ਵਿਚਾਰੇ ਜੇ ਕਹ ਲੈ ਉਹ ਕਹਿੰਦਾ ਵੀ ਵਰਮਾ ਦਾ ਛੋਟਾ ਜਿਹੜਾ ਹੰਤੋਸਾਨ ਬੜਾ ਗੱਲ ਹੈ ਪੱਠਾ ਲਗ ਲ ਸਿਰਸ ਤੋਂ ਰਾਜਾ ਦੁਖੀ ਹੋ ਜੇ ਸਿਰਸ ਰਾਜ ਵੀ ਦੇ ਦिए ਰਾਜਾ ਦੁਖੀ ਆ ਪਰ ਦੁਖੀ ਹੋ ਗਿਆ ਸਿਰਸ ਤੋਂ ਰਾਜ ਗਈ ਹੈ ਸੋਖੋ ਉਹ ਆਵੇਦਾਦਾ ਕਦਮ ਅਦਰ ਆ ਜਾਇਆ ਮੈਂ ਦੁਖੀ ਹਾਂ ਸੁਖ ਨਹੀਂ ਹੈਗਾ ਮੈਨੂੰ ਉਹ ਆ ਛਡਾਉਂਦਾ ਵੀ ਆ ਜਿਹੜੀ ਮੈਂ ਕਰਦਾ ਲੋਕਾਂ ਦੀ ਜ਼ਿੰਮੇਵਾਰੀ ਆਪਣਾ ਚੱਕੀ ਹੋ ਗਿਆ ਮੈਂ ਦੁਖੀ ਹਾਂ ਤੁਸੀਂ ਚੱਕੋ ਨਾ ਲੈ ਸਕੀ ਮੇਰੀ ਚੱਕੀ ਹੋਈ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਕਹਿੰਦਾ ਜਦੋਂ ਚਿੰਤਾ ਤੁਸੀਂ ਕਾਹਦੇ ਕਰਦੇ ਹੋ ਬੇਮਤਲਬ ਚਲੋ ਤੇ ਤਾਂ ਕੋਈ ਚਿੰਤਾ ਜੀ ਕੋਈ ਮਤਲਬ ਹੈ ਸਾਨੂੰ ਨਿਸ਼ਚਿਤ ਕਰਨਾ ਖਾਤਰੋ ਜਿੰਤਾ ਕਰਦੇ ਤਾਂ ਕਿ ਅਸੀਂ ਨਿਸ਼ਚਿਤ ਹੋ ਜਾਈਏ ਪਰ ਅਸੀਂ ਸਿਕੋ ਜਿਆਦਾ ਜਿੰਤਾ ਕਰਦੇ ਇਹ ਪੜਾਈ ਦੀ ਹੈ ਜਿੰਨਾ ਜਰੇ ਪੜਾਈ ਨਹੀਂ ਹੁੰਦੀ ਤੇ ਪ੍ਰੈਸ਼ ਵੀ ਰੱਖਦਾ ਨਹੀਂ ਹੁੰਦਾ ਜਿੰਤਾ ਨਹੀਂ ਜਾਉਂਦਾ ਉਹ ਰਸਤਾ ਤੇ ਤਾਰਾ ਰਹੀ ਸੀ ਮਾਇਆ ਕਾ ਠੀਕਾ ਲਿਜਣਸਾਲ ਸਿੱਤਾਂ ਤੋਂ ਮੁਸੀਗੜਾ ਰਸਤਾ ਸੀ ਤੇ ਰਸਾਈ ਜਾਂਦੇ ਸਾਰੇ ਬੰਦੇ ਨੇ ਹੁਣ ਹੁਣ ਬੋਲਦਾ ਨਾ ਬਸ ਪਰ ਵਿਚ ਨਹੀਂ ਕਲਦਾ ਜੋ ਕੀ ਕਹਾ ਕਰੀਏ ਕੀ ਇਹ ਬਤਾਈਏ ਜਾ ਇਹ ਆਵਰੋ ਪਾਣੀ ਕਹਿੰਦੇ ਉਹਨਾਂ ਦੇ ਤੋਂ ਫਿਰ ਕੀ ਜਾਨਦੀ ਹੈ ਭਾਈ ਪੱਡਰਦਾਰ ਵਿਦਵਾਨ ਤੇ ਹੱਥੋਂ ਤਾਂ ਫਿਰ ਜਾਨਦੀ ਹੈ ਜਿਹੜੂ ਕੈਮ ਦੀ ਲੋੜ ਨਹੀਂ ਉਹਦੇ ਹੱਥ ਜਾਂਦੀ ਏ ਜਿਹਨੂੰ ਚਲਦੈ ਦੀ ਲੋੜ ਨਹੀਂ ਹੱਥ ਉਹਦੇ ਜਾਂਦੀ ਏ ਉਹ ਕਹਿੰਦਾ ਵੀ ਸਾਡੇ ਹੀ ਬੀਜਿਤ ਦਾ ਸਾਪਾ ਪਰ ਬਿਮਾਰੀ ਹੈ ਕੋਈ ਇਹ ਅਰ ਬੋਲਦਾ ਕਬੀਰ ਬੋਲਦਾ ਪਰ ਸਾਡੇ ਬੀਜਿਤ ਨਹੀਂ ਕਰਦਾ ਪਰ ਜੇ ਵੀ ਕਹਿੰਦਾ ਪਰ ਹੀ ਕਹਿੰਦਾ ਬੋਲੇ ਘਰ ਹੈ ਕਬੀਰ ਪਰ ਪੰਡਿਆ ਕਹਿੰਦਾ ਕੋ ਮਤਲਬ ਲਾਗੇ ਉਹ ਲੋਕ ਪੜਨ ਜੀ ਕਹਿੰਦੇ ਨਾ ਪੜਾਈ ਦਾ ਦਾਜਲਾ ਬਗੜਿਆ ਇੱਕ ਗਰੀਬ ਬਹੁਤ ਹੈ ਜਾਤ ਵੀ ਜਲਾਹੇ ਦੇ ਘਰ ਪੈਦਾ ਹੋਇਆ ਹੈ ਲੋਕ ਚੰਗੇ ਚੰਗੇ ਸਾਨੂੰ ਵੀਰ ਆਦਮੀ ਰਜਵਾਲੇ ਬੁੱਢਾ ਦੇਖਦੇ ਨੇ ਸੱਤੀ ਇੱਜ਼ਤ ਦੀ ਕਦੇ ਦੀ ਗੱਲ ਸੁਣਦੀਏ ਮੰਨਦੀਏ ਇੱਜ਼ਤ ਨਹੀਂ ਕਰਦੇ ਗੁਰਬਾਨੀ ਇੱਜ਼ਤ ਨਹੀਂ ਕਰਦੀ ਲੋਕਾਂ ਦੀ ਅਸਲ ਤਾਲੀ ਨੂੰ ਲੜੀ ਜਦ ਨੂੰ ਜੀ ਨਹੀਂ ਕਰਦੀ ਉਹ ਬਹਤਾਰੇ ਲੋਕ ਜਿਆਦਾ ਉਹਾਰੇ ਜਦ ਚੌਧੀ ਹੁੰਦੀ ਹੰਕਾਰੀ ਹੁੰਦੀ ਜਦੋਂ ਮੈਂ ਜਿਤਨੀ ਪਿੰਡੀ ਕੁਰਬਾਨੀ ਚੋਖਾ ਦੇ ਬੰਦੇ ਰੱਖੋ ਜੱਟ ਉਹਨਾਂ ਤੇ ਉਹਨੂੰ ਪੱਠੇ ਦੇਰੀ ਉਹਨੂੰ ਸੋਣਾ ਚਾਹੁੰਦੇ ਸੀ ਹਾਂਜੀ ਸਰੂ ਸ਼੍ਰੇਸ਼ਟ ਕੋ ਰਾਜਾ ਦੁਖੀ ਆ ਸਰੂ ਸ਼੍ਰੇਸ਼ਟ ਕੋ ਰਾਜਾ ਦੁਖੀ ਹੋਂ ਸਾਹਿਬ ਉਸ ਤੋਂ ਇਥੇ ਲ ਭਾਈ ਰਾਜਾ ਹੋ ਨਹੀਂ ਸਕਦਾ ਉਹ ਰਾਜਾ ਹੈਗਾ ਜਾਂ ਫਿਰ ਉਸ ਦੇ ਸਤਾ ਪਰਮੇਸ਼ਰ ਉਹ ਵੀ ਦੁਖੀ ਆ ਸੁਖੀ ਨਹੀਂ ਆ ਸਰੂ ਹੁੰਦਾ ਹੋ ਅਸੀਂ ਤਾਂ ਤੇਆਂ ਸੁਖੀ ਆ ਅਸੀਂ ਤਾਂ ਦੇਖਿਆ ਉਹ ਕਿਸ ਤੇ ਕਹਿੰਦੇ ਅਸੀਂ ਸੁਖੀ ਆ ਜੇ ਦਾ ਦੇਖਿਆ ਹੋਵੇ ਕੋਈ ਦੇਖਿਆ ਹੋਵੇ ਤਾਂ ਕਹੇ ਸੁਭਿਆ ਕ੍ਰਿਸ਼ਨ ਲੈ ਲਓ ਸਾਡੀ ਜਲਦੀ ਕਿ ਲੈ ਲਓ ਕ੍ਰਿਸ਼ਨ ਦੀ ਸੁਭਿਆ ਰਾਮ ਜੰਦਾ ਲੈ ਲਓ ਸੁਭਿਆ ਹੋਈ ਸੁਭੀ ਸਿੰਘ ਜੀ ਦਾ ਪਿਆਰਾ ਉਹ ਰਹਿਦਾ ਇਹ ਤਾਂ ਭਾਂਜਾ ਉਹ ਤਾਂ ਬਾਹਰ ਰਹਦਾ ਉਹਦਾ ਘਰਬੀ ਨਾ ਉਹਨੂੰ ਠੱਡ ਚ ਵੀ ਦੁੱਖ ਗਰਮੀ ਜੀ ਦੇ ਦੁੱਖ ਬਸਾਂਚ ਵੀ ਦੁੱਖ ਉਹਦਾ ਰਹਿੰਦਾ ਉਹਦਾ ਗਲੇ ਤੋਂ ਫਲਾਇਆ ਸੰਸਾਰ ਵਾਲਾ ਸੁਖ ਤਾਂ ਨਹੀਂ ਬਣਿਆ ਜੀ ਜੇ ਬ੍ਰਹਮ ਨਰਾਦੇ ਜੇ ਸੁਖਤੇ ਜੀ ਸੰਦਸ਼ੀ ਬ੍ਰਹਮ ਨਰਾ ਹਾਂ ਜੀ ਇਹ ਸੁਖਤੇ ਸਦਾ ਦੀ ਸੁਖਤੇ 6 ਵਾਰ ਬ੍ਰਹਮ ਦੋੜ ਰਹਿਣ ਵਿਚ ਨੂੰ ਡਰਿਆ ਵਿਚ ਨੂੰ ਡਰਿਆ ਨਹੀਂ ਇਹਨੂੰ ਨਾ ਸੁਣ ਲਿਆ ਜੀ ਰਾਜ ਆ ਦੇ ਪਾਸੇ ਜਾਏ ਰਹੇ ਰਾਜ ਆ ਦੇ ਪਾਸੇ ਜਾ ਗਏ ਹਾਂ ਜੀ ਲੱਖ ਕਰੋੜੇ ਬੰਦ ਨਾ ਪਰੇ ਨਾਮ ਦਾ ਸੁਖ ਜਰਾ ਸੁਖੀ ਹਾਂ ਦੇਖੋ ਹਰ ਨਾਮ ਜਪ ਤੇ ਜੇ ਸੁਖ ਹਦਾ ਲੋਕ ਨਹੀਂ ਜਿਹੜੇ ਜਪਣ ਵਾਲੇ ਨੇ ਤਾਂ ਤਾਂ ਜਪ ਰਹੇ ਹੋਏ ਕੋਈ ਜੋ ਸੁਖ ਨਹੀਂ ਹੋ ਰਿਹਾ ਨਾਮ ਜਪਣ ਨਾਲ ਸਿਰੋ ਨਾਮ ਦੀ ਅਵਲ ਕੁਝ ਹੋ ਕਰਦੇ ਜੀ ਤੇ ਉਹਨਾਂ ਨੇ ਆਪ ਦੇ ਇੰਦਰਾ ਨੂੰ ਕੋ ਤਾਂ ਦਾਸਤਾਵੇ ਹਰ ਕਾ ਨਾਮ ਜਪ ਤੁਰ ਸੁਜੀ ਰਹੇ ਹਰ ਕਾ ਨਾਮ ਜਪ ਕੇ ਸੁਖ ਹੋ ਜਾਂਦਾ ਆਟਾ ਜਾਇ ਹਾਰੇ ਦਾ ਹੀ ਹੋਵੇ ਸਾਨੂੰ ਸੁਆ ਡੰਗਾ ਹੋ ਗਈ ਨਾ ਜੈ ਜੋ ਕੇ ਸਭੂ ਲੋ ਚੰਗੂ ਲੋ ਹੀ ਹੋਵੇ ਕਰਨ ਸੁਖੀ ਹੁੰਦਾ ਹੋ ਅਜੀਤ ਆਇਆ ਗੱਲ ਨਾਲ ਸੁਖੀ ਨਹੀਂ ਹੁੰਦਾ ਅਜੀਤ ਮਾਇਆ ਦੀ ਸੁਖੀ ਸਾਡੇ ਦੇਸ਼ੀ ਕੋਣਸ ਸੰਸਾਰ ਦੀ ਗੱਲ ਨਹੀਂ ਆਇਆ ਹੈ ਗੁਰਬਾਨ ਸੰਸਾਰੀ ਦੇਸ਼ੀ ਤੋਂ ਉਲਟ ਗੱਲ ਆ ਉਹ ਅੰਦਰੇ ਨਾਮ ਜਪਦੇ ਨੇ ਗੱਲ ਉਹਨਾਂ ਨੂੰ ਕਹੀ ਉਹ ਸੰਸਾਰ ਨੂੰ ਕੱਲ ਕਹੀ ਕੋਈ ਨਾਮ ਜਪ ਰਹੇ ਹੈ ਵਾਸਤੇ ਜਪ ਰਹੇ ਹੈ ਗੱਲ ਅਵਾਦੀ ਨੂੰ ਨਹੀਂ ਗਈ ਹੋਈ ਹੈ ਅਸੀਂ ਦਰਸ਼ਨ ਜਨਨਲਾ ਜਿੱਤੇ ਗੱਲ ਹੈ ਜਦ ਸਾਰੀ ਕਰਵਾਣ ਜਿਹੜਾ ਧਰਮ ਕੋਣ ਦਾ ਆਦੀ ਦਾਵਾ ਕਰਦਾ ਗੱਲ ਉਹ ਨਹੀਂ ਜੀ ਪ੍ਰਚਾਰ ਵੀ ਕਰਦਾ ਧਰਮ ਕੋਣ ਦਾ ਦਾਵਾ ਕਰਿਆ ਤੁਸੀਂ ਸਭ ਤੋਂ ਉਹ ਗੱਲ ਚੱਲੀ ਆਵਾਜ਼ ਨੂੰ ਦੀ ਗੱਲ ਹੈ ਆਵਾਜ਼ ਨੂੰ ਜਲੇ ਜਾਂਦੇ ਨੇ ਸੱਚ ਕੋਲੋਂ ਸੁਣਨੀਆਂ ਤੋਂ ਗੱਲਾਂ ਉਹ ਵੀ ਮੰਨ ਕੇ ਵਿਆਹ ਆ ਉਹਦਾ ਨਾਮ ਦੀ ਬੈਠ ਸਕਦੇ ਜਿੱਦਾਂ ਸੰਸ ਵਿੱਚ ਬੈਠੇ ਨੇ ਮਾਲਾ ਫੇਰ ਤੇ ਨਾਮ ਆਜ਼ਮੀ ਤਾਂ ਨਹੀਂ ਬੈਠ ਸਕਦਾ ਇਸ ਦੀ ਆਦਿ ਉਹਦੇ ਪ੍ਰਭਾਵ ਸੋ ਜਾਂਦਾ ਚਲੋ ਕੋਸ਼ਿਸ਼ ਹੁੰਦਾ ਆ ਨਾਮ ਦੀ ਇਹ ਤੇ ਪ੍ਰਭਾਵ ਤਾਂ ਐਵੇਂ ਪ੍ਰਭਾਵ ਸੋ ਜਾਂਦੇ ਜੀ ਜਿਹੜਾ ਨਾਮ ਜਪਣ ਵਾਸਤੇ ਮੁਕਤੀ ਵਾਸਤੇ ਇੱਕ ਜੇ ਬਣਾ ਕੇ ਜਪ ਰਿਹਾ ਹੈ ਜਿਸ ਘਰ ਬਾਗ ਛੱਡਿਆ ਹੈ ਗੰਤਾ ਉਹਦੀ ਹੈ ਜੋ ਕਹਾਦਿਆਂ ਨੂੰ ਕਹਦਾ ਮੇਰਾ ਕੋਈ ਕੁਛ ਨਹੀਂ ਲੱਗਦਾ ਮੈਂ ਤਾਂ ਵਾਲੇ ਹੀ ਫਿਰਦੀ ਮੈਂ ਤਾਂ ਸੱਦੇ ਬੰਨ ਗੱਲ ਤਾਂ ਉਹਦੀ ਹੈ ਉਹ ਲੋਕ ਕੀ ਕਰਦੇ ਇਸ ਉਹ ਕੁਝ ਲੱਪਣ ਕਹਿੰਦਾ ਦੂਏ ਨੂੰ ਦੱਸਦੇ ਜੋ ਕੁਝ ਦੱਸ ਰਹੇ ਨੇ ਗੱਲ ਤਾਂ ਸਹੀ ਜੀ ਉਹਨਾਂ ਨੇ ਜੋ ਪਿੜਤ ਪਾਈ ਹੋਈ ਹੈ ਦੂਏ ਲੋਕਾਂ ਨੂੰ ਦੱਸਦੇ ਦੂਏ ਲੋਕ ਤਾਂ ਨਹੀਂ ਬਲਦੇ ਕਿਉਂਕਿ ਇਹਨਾਂ ਲੋਕਾਂ ਨੂੰ ਖੁਦ ਨੂੰ ਜ਼ੁਬਰੀ ਹੋਇਆ ਨਾ ਹੁੰਦਾ ਕੋਈ ਇਸ ਬਣ ਗਈ ਤੁਹੇ ਲਖਣਾ ਵੀ ਨਾ ਵਰਤ ਕੋਈ ਤੇ ਅਸੀਂ ਕਹੂ ਲੋ ਆਪਣੇ ਭਲਾ ਜਦ ਇੱਕ ਦਵਾਈ ਖਾਦੇ ਹੋਣ ਕੁਛ ਆਦਮੀ ਅਰੇ ਉਹਨਾਂ ਕੋ ਰਜਾਤ ਨਾ ਉਹ ਖਾਂਦੇ ਹੀ ਭਲਾ ਖਾਣਾ ਜ਼ਰੂਰੀ ਹੈ ਦਵਾਈ ਬੇਮਤਲ ਪਰ ਇਹ ਵੀ ਗੱਲ ਦਵਾਈ ਤੇ ਖੜਾਉਣਾ ਉਹਦਾ ਫਾਇਦਾ ਕੋਈ ਨਹੀਂ ਸੁਭਾ ਨੂੰ ਖਾਣ ਦੇ ਤੇ ਦਵਾਈ ਜਦ ਨਾਲ ਲੋਕ ਕਦੇ ਕਰਮ ਛੱਡਣ ਦਾ ਕਾਰਨ ਹੈ ਜੋ ਕੁਝ ਪ੍ਰਚਾਰਿਆ ਗਿਆ ਸਾਰੀ ਉਮਰ ਤੱਕ ਉਹਦਾ ਰਿਜ਼ਲਟ ਇਹ ਨਹੀਂ ਕੋਈ ਕਿਤੇ ਜੀਂਦ ਜੀਂਦ ਦਾ ਵਾਇਦਾ ਲੈ ਲਿਆ ਫਿਰ ਛੱਡੇ ਰਹਿ ਗਏ ਨਾ ਹਮਸਾਰਾ ਜੀ ਰਿਹਾ ਰਲਟ ਫੇਰ ਕਦ ਬੁਲਦਾ ਜੇ ਗਿਆਨ ਦਾ ਰੋਜ਼ ਬੁਲਦਾ ਫੇਰ ਕਦ ਚੱਲਦੀ ਹੈ ਰੋਜ਼ ਦਾ ਰੋਜ਼ ਨੂੰ ਇਤਨਾ ਬੁਲਦਾ ਫੇਰ ਆਖਦੀ ਨੂੰ ਉਦੋਂ ਉਸੇ ਜਾਂਦਾ ਜੇ ਤੋ ਇਸ ਆਖੀ ਨੂੰ ਸੁਣ ਜਾਓ ਸਭੋ ਜਿਹੜਿਆਂ ਨੂੰ ਦਾੜ ਦੇ ਮੁੰਡੇ ਜਿਹੜੇ ਛੱਡ ਗਏ ਟ੍ਰੈਡੀਸ਼ਨਲ ਪ੍ਰਚਾਰ ਨੂੰ ਉਹ ਸਭ ਨੇ ਹਾਂ ਕਿਉਂਕਿ ਉਹ ਗਿਆ ਬਰਕਾ ਦੇ ਜਾਣਗੇ ਇਹਨੂੰ ਛੱਡ ਗਏ ਥੰਨੇ ਆਲੇ ਹੋਰ ਤਰ੍ਹਾਂ ਦਾ ਮਾਹੌਲ ਉੱਥੇ ਜਿਹੜੀ ਹੈ ਨਾ ਜਲੀਲ ਜੇ ਬਦੌਦਾਰਾ ਤੋਂ ਉਹ ਮੁੰਡਾ ਹਾਂ ਉਹ ਤਾਂ ਤੂੰ ਇਹ ਬਾਹਰ ਜਾ ਕੇ ਤੇਰੀ ਤੇਰੀ ਡਿਲੀਵਰ ਠੀਕ ਆ ਪਰ ਅਸੀਂ ਜੀਵਤ ਦੇ ਉਹ ਉਹ ਮਹਾਜਰਾ ਹੈ ਤਾਂ ਯੂਰਪ ਦਾ ਯੂਰਪ ਰਾਤੀ ਦਲੀਲ ਨੂੰ ਬੁਜਾਉਂਦੇ ਨੇ ਦੇਖੋ ਖੜਦਾ ਸਾਡੇ ਇਹ ਪਿਆ ਮਿਹਨਤ ਜਦੋਂ ਸਕਿੱਲ ਦੀ ਉਹਨਾਂ ਨੇ ਗੱਲ ਪਾਈ ਆ ਜਿੰਨੇ ਜਿੰਨੇ ਵੀ ਸਕਿੱਲ ਆਏਗੀ ਆ ਕੋਈ ਦੀ ਕਿਸੇ ਦੀ ਉਹਨਾਂ ਨੇ ਜੀਵਨ ਦੁਬਾਈ ਆ ਹਾਂਜੀ ਲਾਹੂ ਕਰੋਰੀ ਵੰਦਨਾ ਪੜਿਆ ਹਾਂ लाख करोड़ वंदन परए हां लाख करोड़ वंदन परए वंदन परए लाख करोड़ वंदन परए फड़का नाम जब तो निस्तारे ताहिं तरुगा जबन परए जबन पे इनी तन्ना ਲੱਖਾਂ ਕਰੋੜਾਂ ਬੰਦਨ ਪਿਆ ਹੋਇਆ ਵੀ ਇੱਕ ਦੋ ਬੰਦਨ ਨਹੀਂ ਲੱਖਾਂ ਕਰੋੜਾਂ ਬੰਦਨ ਪਿਆ ਹੋਇਆ ਵੀ ਲੱਖ ਕਰੋੜ ਬੰਦਨ ਔਗੜ ਹੁੰਦੇ ਨੇ ਨਾਲ ਕਾ ਔਗੜ ਜੇ ਤੜੇ ਜੇ ਤਾਂ ਕਟਿਆ ਨਾ ਸੇ ਪਾਈ ਸੇ ਵੀਰ ਉਹ ਕਹਿੰਦੇ ਲੱਖਾਂ ਕਰੋੜਾਂ ਬੰਦਨ ਇਹ ਪੱਜੇ ਬੰਦਨ ਕਾਇਨੇ ਰੋ ਜਿਹੜਾ ਉਹਨੇ ਪੰਜ ਜਗਾਂ ਕਰੋੜ ਰੋ ਕਹਿੰਦੇ ਲੱਖਾਂ ਬੰਦਨ ਹੋਣ ਅਰ ਕਾ ਨਾਮ ਜਬ ਤਬ ਇਸ ਤਰ੍ਹਾਂ ਆਇਤਾ ਨਾਮ ਜਬ ਤਬ ਇਸ ਤਰ੍ਹਾਂ ਆਇਗਾ ਨਾਮ ਜਬ ਬਿਲਜੇ ਖਾ ਬਲਗਾ ਬਿਲਜੇ ਤਰੇ ਹਾਂ ਬਲੇ 50 ਵੀ ਦੇਰ ਤੇ 50 ਹਜ਼ਾਰ ਹੋਵੇ ਤੂੰ ਲੈ ਆਜਾ ਬੈਠ ਮੈਂ ਤੁਹਾਨੂੰ ਬੋਲਾਂ ਠੇਕਾ ਲਿੱਤਾ ਜਿਹੜੀ ਵਰਹੀ ਬਿਮਾਰੀਆਂ ਜ਼ਰੀਏ ਜੋ ਇਹ ਸਗਰ ਰੋਗ ਕੋ ਕल्याण ਰੂਪ ਬਖਤਲਗੜ ਦਾ ਤੇ ਜਿਹੜੀਆਂ ਅਜੇ ਤੋ ਲਿਆ ਹੋ ਗੁਬਾਰੀਆਂ ਢੰਡਾ ਚੱਲੀਆਂ ਵਰਦੀ ਵਈ ਕੋਈ ਜਲਦੀ ਐ ਪੁੜੀ ਕੋਈ ਜਲਦੀ ਫੇਰ ਅਗਲਾ ਹੋਰ ਉਸ ਦੂਜੇ ਦੀ ਜੈ ਹਾਂਜੀ ਇਹਨੇ ਕਿਹਾ ਪਹਿਲਾਂ ਕੀ ਹੋ ਰਿਹਾ ਸੀ ਅਸਰ ਜੀ ਗੱਲ ਕਿਉਂ ਗਈ ਪਹਿਲਾਂ ਹੋਰ ਤਰੀਕੇ ਨਾਲ ਸੀ ਉਹ ਇੱਕ ਇੱਕ ਕਰਕੇ ਅਲੱਗ ਕਰ ਦੇ। ਤਾਂ ਇਹ ਉਹ ਲਾਜ਼ਗਾ ਨਾ ਮੈਂ ਕੰਮ ਦਿੱਤਿਆ। ਮਤਲਬ ਕਿ ਪਹਿਲਾਂ ਐਸੀ ਰੱਖਦੇ ਹਾਂ। ਸਾਰੇ। ਕੱਲਾ ਕੱਲਾ ਜਿਸ ਤੋਂ ਕੱਲਾ ਕੱਲਾ ਉੱਪਰ ਤੋਂ ਪਾਰ ਕੋਈ ਕੰਮ ਨਹੀਂ ਅੱਗੇ ਨਹੀਂ ਹੋ। 그러면은 ਚੱਤੀ ਹੋਇਆ। ਕਵੀਨ ਨੇ ਕੀ ਕਿਹਾ ਸੀ ਕੁਝ ਪਹਿਲਾਂ ਹੈ ਅਪਨੋ ਉਹ ਸੁਣ ਲੈ ਕਿ ਕਿ ਤਾਏ ਬੰਤੀ ਦਾ ਖਾਦੀ ਖਾਦੀ ਗੱਲ ਨੇ ਕੀ ਕਿਹਾ ਕਹਿੰਦਾ ਮਾਰਾ ਹੈ ਕਾ ਤਾਜਾਂ ਨੇ ਕੜੇ ਜਿੰਨੇ ਕੋ ਕਾਲ ਦੇ ਕਿ ਆਪਾਂ ਦੇ ਬਾਕੀ ਸਭ ਕਰ ਜਾਣਗੇ ਜਾਣਗੇ ਜਲ ਵਗ ਰਣੀ ਹੈ ਤਾਪੇ ਜੀ ਆਪਾਂ ਜਲ ਵਗਦੀ ਡਾਣੀ ਪਹਿਲਾ ਪੱਤੇ ਤੋਂ ਡੀਏ ਫਿਰ 16 ਤੋਂ ਡੀਏ ਵੇ ਟਾਣੀਆਂ ਤੋਂ ਡੀਏ ਫਿਰ ਮੋਟੀਆਂ ਡਾਣੀਆਂ ਤੋਂ ਡੀਏ ਫਿਰ ਉਹ ਬੜੇ ਟਾਣੇ ਵੱਟੀਏ ਥੱਲੇ ਨੂੰ ਆਈਏ ਆਪਾਂ ਜਦ ਤੋਂ ਹੀ ਕੋਨਾ ਵੱਟਦੀਏ ਜੜ ਕੀ ਹੈ ਜੜ ਭਰਬ ਇੱਕ ਮਰੰਤ ਹੋਏ ਬਾਕੀ ਨਾ ਪਰਦੇ ਚਲੇ ਜਣ ਦੋ ਵਰਤ ਚਾਰ ਚਾਰ ਮਾਰਨ ਤੇ 6 ਮੂਏ ਚਾਰ ਬੁਰਖ ਦੋ ਨਾਲ ਮਾਰਨਾ ਇੱਕ ਇੱਕ ਦੇ ਦਾੜੇ ਗਏ ਮਾਇਆ ਇੱਕ ਦੇ ਦਾੜੇ ਦੱਸ ਪਾ ਜ ਉਹਨਾਂ ਨੇ। ਮੈਂ ਤਾਂ ਕਹਿੰਦਾ ਭੂਪ ਬਿਨਾ ਕਰੇ ਕੌਣ ਲੜਾਈ? ਹੌਲ ਲੜਾਈ। ਰਾਜਾ ਮਾਰਦੇ ਹੋ ਜੰਦਾ ਜੂਰ ਮਾਰਦੀ ਆ ਤੁਸੀਂ। ਇਹ ਤਾਂ ਕੋਈ ਨਹੀਂ। ਯਾਰ ਤਾਂ ਆਪਣੀ ਨਹੀਂ ਫਿਰ। ਉਹਦਾ ਰਾਜਾ ਆਪਣਾ ਵਰਜਾ ਵੀ ਆਪਣੀ ਹੈ। ਖਜ਼ਾਨਾ ਵੀ ਆਪਣਾ ਹਥਿਆਰ ਵੀ ਆਪਣਾ ਨੇ ਸਭ ਕੁਝ ਆਪਣਾ ਹੀ ਹੈ। ਅਰੇ ਘਰ ਆ ਸੀ। ਇਹ ਬਨੇ ਰਾਜਾ ਹੈ ਬਵਾਸੀ ਇਹੀ ੜਕਾ ਕਦੇ ਜਿੱਤਿਆ ਗਿਆ ਬਾਹਰ ਗਿਆ ਬਸ ਸੰਗੋ ਸੰਗੋ ਜੱਟ ਗਿਆ ਵਰਜੀ ਤੇ ਜੱਗੀ ਤੇ ਵਰਜੀ ਅਨੇਕ ਮਾਇਆ ਲੱਖ ਕਰੋੜ ਰੁਪਏ ਤਾਂ ਪੜੇ ਹਾਂ ਇੱਕ ਇੱਕ ਉਹਨੇ ਕਹਾ ਸਾਰੇ ਜਿੱਤੋ ਇਕੱਠੇ ਇੱਕ ਮਾਰੂ ਇੱਕ ਨੂੰ ਟਾਰਗੇਟ ਬਣਾ ਲਿਆ ਉਹ ਟਾਰਗੇਟ ਉਹਨੇ ਤਾਂ ਬਣਾ ਲਿਆ ਗੋਲ-ਬੋਲ ਗੱਲ ਕਰਤੀ ਇੱਕ ਮਨਸ ਤੇ ਇਹ ਠੀਕ ਜੀ ਅੱਜ ਦਾ ਨਾਮ ਛੇ ਤੰਦ ਛੇ ਰਸੇ ਛੇ ਘੜੇ ਘੜੇ ਉਹਨੇ ਗੋਲ ਮੋੜ ਦਾ ਲਗਾ ਛੇ ਛੇ ਮਿੰਟ ਦੱਸਿਆ ਜਿਹੜਾ ਮਾਰਨਾ ਦੇ ਛੇ ਆਂਜੇ ਪੱਤੇ ਨੇ ਛੇ ਮਾ ਪਰਬ ਪਰਬੇ ਪੂਰਾ ਗੈਰ ਦੇ ਹਸਾਵਾ ਘੂਟੋ ਆਂਡਾ ਪਰਬ ਕਾ ਉਹਨੇ ਪਿਆ ਪਰਗਾ ਉਹਨੇ ਫਿਰ ਛੇ ਮਿੰਟਾਂ ਤੋਂ ਛੇ ਵਾ ਸਾਰਿਆਂ ਦੀ ਮਾ ਪਰਬ ਉਹ ਜੋ ਪੈਦਾ ਹੁੰਦਾ ਫਿਰ ਮਾਰਨਾ ਕਰਿਆ ਗੁਰਪ੍ਰਸਾਦ ਘਰ ਪਤਾ ਨਾਲ ਆ ਗਿਆਨ ਦੀ ਕਿਰਪਾ ਨਾਲ ਪਰਮ ਬਾਗਲਾ ਨੇ ਵਾਕੀ ਸਾਬ ਆ ਕੇ ਮਰ ਜਾਂਦੇ ਇਹਨੂੰ ਕਹਿੰਦੇ ਨਾਮ ਉਹ ਗਿਆਨ ਦਾ ਇਹ ਨਾਮ ਦਾ ਉਹ ਉਹ ਦਾਰੂ ਉਹੀ ਹੈ ਸੰثار ਰੋਗੀ ਨਾਮਦਾਰ ਹੋਜੀ ਲੱਖ ਕਰੋੜੀ ਬੰਦਰ ਪਰੇ ਹਰ ਨਾਮ ਜਪਤ ਨਿਸਤਰੇ ਪਰੇ ਪਏ ਹੋਣ ਜਿਹੜੇ ਹਰ ਨਾਮ ਲੈ ਲੈ ਆ ਲੈ ਇੱਕ ਮੁੰਡੇ ਦਾ ਤੇ ਨਾ ਲੈਤਾ ਘਰੀ ਬੰਦਾ ਉਹ ਰਾਮ ਲਿਖੇ ਤੇ ਪੱਥਰ ਤਾਂ ਹੀ ਕਰੇ ਤੇ ਉਹ ਲਿਖਿਆ ਨਹੀਂ ਤੇ ਲਿਆ ਸੀ ਇਹਦੇ ਲਿਖਿਆ ਸੀ ਜਿਹਨੇ ਅੰਦਰ ਲਿਖਿਆ ਸੀ ਨਾ ਆਪਣੇ ਰਾਮ ਰਾਮ ਦੀ ਕਥਾ ਉਹ ਦਰਿਆ ਸੀ ਉਹ ਯਾ ਸਰੀਰਾਂ ਚ ਨਾ ਜਲ ਪਾਣੀ ਦੇ ਬੁਲਬਲੇ ਫਸਿਆ ਉਹ ਨਾ ਚੁਪਿਆ ਹੋਇਆ ਜਾਏ ਤਾਂ ਉੱਠ ਖੜਿਆ ਗਰ ਗਿਆ ਉਸੇ ਹਰਿ ਹਨੇਤ ਮਾਇਆ ਰੰਗ ਪਹਿਨਦਾ ਉਹ ਮਾਇਆ ਦੇ ਵਿੱਚ ਹੈ ਸਮੁੰਦਰ ਦੇ ਵਿੱਚ ਹੈ ਪਾਣੀ ਦੇ ਵਿੱਚ ਹੈ ਪਰ ਤਰਦਾ ਰਹਿੰਦਾ ਹੈ ਤੋ ਜਾ ਸਕਦਾ ਗਿਆਨਤਾ ਦਾ ਸਮੁੰਦਰ ਦੇ ਦੀ ਪਾਰ ਕੀਤੀ ਆ ਜਿਸ ਗਿਆਨਤਾ ਨੂੰ ਕਹਿੰਦੇ ਨੇ ਆਹੋ ਦੇਰੇ ਨੂੰ ਕਹਿੰਦੇ ਨੇ ਉਹਦੀ 15 ਵਾਰ ਕੀਤੀ ਆ। ਭਾਇਆ ਬ੍ਰਹਮ ਤੇ ਅੱਡ ਜਿਓ ਤੱਕ ਰੱਖਦੇ ਸੀ। ਜਾਨੂੰ ਚੱਤੇ ਨਹੀਂ ਆਏ ਜਿਹੜੇ। ਆਇਆ ਆਪਣਾ ਕੁਰੇਬੇ ਸਰ ਸਾਹ। ਅਕਾਸ਼ ਅਕਾਸ਼ ਹੈ। ਰਾਜਿਤਮ ਆਏਗਾ ਇਸ ਅਕਾਸ਼ ਛੱਡ ਕੇ ਤੇ ਕਦੇ ਨਹੀਂ ਆਵੇਂ ਗੱਲ ਸੁਣਾਈ। ਛੇਆ ਭਾਇਆ ਵਿਚੋ ਦਸੀਏ। ਅਨਕਮਾਇਆ ਰੰਗ ਟਿਕਣਾ ਭੁਜਾਵਿਆ ਹਰ ਕਾ ਨਾਮ ਜਬ ਤੇ ਅਦਾਵਾ ਹੈ ਹਾਂ ਸ੍ਰੀ ਕਬਾਇਆ ਰੰਗ ਟਿਕਣਾ ਦੀ ਪਰ ਜੇ ਹਰ ਨਾਮ ਲੈ ਲਵੇ ਕੱਲ یونیورسٹی ਤੁਸੀਂ ਗੱਲ ਹੈ ਨਹੀਂ ਕਿ ਇਹ ਰੰਗ ਟਿਕਣਾ ਭੁਜਾਵੇ ਜੀ ਜੂੜ ਵਾਹਿਗੁਰੂ ਜੀ ਕ੍ਰੰਮ ਕਰਮ ਕਰਮ ਹਾਂ ਹਰ ਦਾ ਨਾਮ ਲੈ ਲਓ ਫੇਰ ਦੇਖ ਲਓ ਕਿ ਤੇ ਖਾ ਹੈਗੀ ਨਾ ਹੈਗੀ। ਹਰ ਦਾ ਨਾਮ ਜਦੋਂ ਦਿਖਾ ਦੀ ਸਕਦਾ। ਤੂੰ ਉਹੀ ਕਹਿਦਾ ਮੇਰੇ ਕੋ ਇਹ ਕਹਤਾ ਸਾਬਦ ਹੋ ਜਾਂਦਾ। ਅੰਦਰ ਰਹਿੰਦਾ ਹੀ ਨਹੀਂ ਅੰਦਰ। ਤਾਂ ਅਨੰਤ ਮਾਇਆ ਰੰਗ ਤਿਕਨਾ 부ਝਾਵੈ ਹਰ ਕਾ ਨਾਮ ਜਪਤ ਉਭਾਵੈ ਨਾਮ ਜਪਤ ਸਾਰੇ ਮਨ ਤੋਂ ਜਸਾ ਕੋ ਦੁੱਖ ਨਹੀਂ ਰਹਤੀ ਸਿਜਤ ਹੈ ਜੀ ਹਰ ਕਾ ਨਾਮ ਜਪ ਲਵੇ ਜਪ ਲਦੇ ਅਜੇ ਜਪਣ ਦੀ ਉਹ ਗੱਲ ਹੈ ਤਾਂ ਇਹ ਜਪ ਪਹਿਲੇ ਸੇ ਜਾ ਜਪਦੇ ਨਾਲ ਸਤੋ ਹੋ ਜਾਣਾ ਸਭ ਹੋ ਜਾਣਾ ਸਭ ਸਬੁਰਨਾ ਇਹੋ ਉਹਦੇ ਇਸ ਦੇ ਜਦ ਸਬੁਰਨਾ ਇਸ ਤੇ ਇਹਦਾ ਆਨੇ ਪਹਿਲੇ ਹੀ ਠੀਕ ਹੋ ਜਾਂਦਾ ਮਾਇਆ ਦੀ ਗੱਲ ਤਾਂ ਹੋਈ ਨਹੀਂ ਤੈਨੂੰ ਪਤਾ ਮਾਇਆ ਜੀ ਦੇ ਸਬੁਰਨਾ ਦਾ ਭਗਤੀ ਹੋਣੀ ਸ਼ੁਰੂ ਹੁੰਦੀ ਹੈ ਸਬੁਰਤ ਦੇ ਤਾਂ ਆ ਛੱਡ ਹੁੰਦਾ ਤਾਂ ਜੋ ਕਰਾ ਕਰਾਹੇ ਪਿਆ ਹੈ ਇਹ ਛੱਡਣ ਦੀ ਜੇ ਰਸਤਾ ਬਦਲਿਆ ਰਸਤਾ ਬਦਲਿਆ ਸਬੁਰਤ ਸੇਬਲ ਦੇ ਅਸਲੀ ਸਫਰੇ ਅਸਲੀ ਸਫਰੇ ਸੇਬਲ ਜੇ ਸੇਬਲ ਜਿੱਥੇ ਸਫਰਤਾ ਲੈ ਬਿਠੇ ਫੈਦਾ ਉਹ ਦਚਿਤੀ ਹੈ ਉੱਥੇ ਫੈਦਾ ਦਚਿਤੀ ਹੈ ਬੁਨਾਦਲਾ ਬੁਨਾਦਲਾ ਜਿਵੇਂ ਉਹ ਸ੍ਰੀ ਗੁਰੂ ਵਗੈਰਾ ਰਹੇ ਜੀ ਅੜਕੇ ਵਿਚ ਆੜਕੇ ਜੀਤੋ ਦਚਿਤੀ ਚੇਟ ਅੜਕੇ ਸੇਬਲ ਦੀ ਜਰੂਰ ਹੈ ਫਿਰ ਅਗਲੇ ਜਨਮ ਚੋਣ ਉਹ ਜਿਹੜਾ ਹਰਕਾ ਨਾਮ ਜਦੋਂ ਗੱਤ ਪਾ ਰਿਹਾ ਗੱਤ ਹੀ ਉਹਨੂੰ ਪਉਣੀ ਜਦੋਂ ਤੋਂ ਬਾਅਦ ਮੇਰਾ ਖੜਾ ਹੈ ਉਹਨੇ ਛੁਰੇ ਜਾਂਦਾ ਹਾਂ ਕੱਟਾ ਪਹਿਲਾਂ ਨਹੀਂ ਕਾਲੇ ਸੀ ਹਰਕਾ ਨਾਮ ਜਦੋਂ ਮੈਂ ਤੋਂ ਵੀ ਗੱਤ ਪਾਲੇ ਸੀ ਯਾਨ ਹੋ ਜਾਂਦਾ ਪਰ ਸਿਮਰਨ ਦੇ ਵਿੱਚ ਜਿਹੜਾ ਇਹ ਚਿਰਾਂ ਉਹ ਗੱਲ ਹੋਰ ਮੰਤਨ ਤੇ ਸਾਰੀ ਗੱਲ ਬੁਝ ਲੈਂਦਾ ਚਾਂ ਲਾਂਗੇ ਅਰ ਬੁਝੜੇ ਬੱਤ ਜਦੋਂ ਗੱਲ ਬੁਝੜੇ ਹਰਕਾ ਸੁਣ ਕੇ ਜਾਣਤਾ ਲਿਆ ਕਿ ਬੁਢੇ ਜੀ ਸੁਣਣਾ ਲੈ ਪੜਨਾ ਆ ਜਾਂਦਾ ਹਾਂ ਜਾਣ ਵੀ ਨੇ ਸੁਣ ਲਿਆ ਜਪ ਵਿਆਖਿਆ ਵੀ ਸੁਣ ਲਈ ਜਾਣ ਵੀ ਲਿਆ ਜਪ ਵੀ ਲਿਆ ਪਰ ਜੇ ਬੁਢੇ ਜੀ ਦਾpropto ਸਾਰੀ ਕੀਤੀ ਤਾਂ ਗਿਆਨ ਅਸਾ ਸੱਤ ਕਰਕੇ ਮਨੋਂ ਗੋ ਸਿੱਖੋ ਸੋ ਕੋਲ ਬੈਠੇ ਨੇ ਸਮਝਾ ਰਹੇ ਨੇ ਉਹ ਵੀ ਕਹਿ ਰਿਹਾ ਸੱਤ ਕਰਕੇ ਉਹਦਾ ਕਹਿ ਰਿਹਾ ਉਹ ਤਾਂ ਸੱਚਾ ਰਹੇ ਉਹ ਵੀ ਕਹਿ ਰਿਹਾ ਸੱਤ ਉਦੋਂ ਵੀ ਸੱਤ ਕਰਕੇ ਨਹੀਂ ਸੀ ਬੰਦੇ ਨੂੰ ਵੀ ਜਦ ਦਾ ਪਾਗੰਦੇ ਸੀ ਸਾਰਿਆਂ ਦੀ ਕਬਰ ਤਾਂ ਹੀ ਦਿੱਤੀ ਹੁੰਦੀ ਤੇ ਛਾਲੇ ਨੂੰ ਉਠਾ ਲਵੇ ਤੇ ਕਬਾੜੇ ਵਰਦਾਰਾ ਖੱਢੀਏ ਪੁੱਤ ਸਾਡੇ ਕੋਲ ਨਹੀਂ ਤੇ ਅੱਜ ਕੋਦਰ ਕੀ ਜਰ ਰਹੇਗਾ ਅੱਜ ਕੋਦਰ ਕੀ ਹੀ ਹੁੰਦਾ ਹੁੰਦਾ ਹੈ ਉਹ ਕੋਲ ਕਾਹੀ ਜੈ ਮਾਰਗ ਇਹ ਜਦ ਅਕੇਲਾ ਤੇ ਹਰ ਨਾਮ ਸੱਗ ਹੋ ਤੋ ਸੁਹੇਲਾ ਇਹ ਮਾਰਗੇ ਜਾਤਾ ਸੇਲਾ ਜਿਹੜੇ ਮਾਰਨ ਤੇ ਕੱਲ ਜੰਦੇ ਸਾਰੇ ਕਹਿੰਦੇ ਨੇ ਅਗਰ ਲੱਗ ਉਥੇ ਛਾਹੀ ਤੇ ਜਾਉਂ ਉਹ ਸੜਸਤੇ ਜਿੱਥੇ ਅਕੇਲਾ ਹੈ ਉਹ ਟੇੜਾ ਇਕੱਲਾ ਪੰਨ ਰਹਿੰਦਾ ਕਿਉਂਕਿ ਅਕੇਲਾ ਹੀ ਹੁੰਦਾ ਜਦ ਵਿਚਾਰ ਕਰਦਾ ਜਿੰਨਾ ਜਦ ਅਕੇਲਾ ਹੁੰਦਾ ਨਹੀਂ ਨਾ ਉਹਨਾਂ ਜਦ ਪੱਕਦਾ ਇਹ ਨਹੀਂ ਹੈ ਕੇਲਾ ਪਾਕਾ ਛਾੜ ਛਾੜ ਗਿਆ ਸਰੀਰ ਛਾੜਿਆ ਜੋ ਬਨ ਫਲ ਭੱਕ ਕੇ ਜਿਸ ਤਰ੍ਹਾਂ ਕੇਲਾ ਵੀ ਹੁੰਦਾ ਕੇ ਮਾਇਆ ਵੀ ਛੱਡਦਾ ਉਹ ਹੀ ਹੁੰਦਾ ਕੇਲਾ ਰੰਗ ਦੀ ਜਲੀ ਆਦਤ ਹੋਈਏ ਕੇਲਾ ਹੁਸੈ ਰਹੇ ਗਾਂਦੇ ਕੋਲ ਨੂੰ ਇਹ ਲੱਗ ਹੁੰਦਾ ਹੀ ਹੈ ਅਸੱਚਾ ਹੈ ਕਿ ਇਹ ਦੁਨੀਆ ਕਹਿੰਦੀ ਹੈ ਇਕੱਲਾ ਅਜੀ ਉਹਦਾ ਜੁੜਾ ਸਾਰੀ ਦੁਨੀਆ ਨਾਲ ਉਹਦਾ ਜਿਹੜਾ ਜੁੜਿਆ ਸਾਰੀ ਦੁਨੀਆ ਜੁੜੀ ਹੋਈ ਯਾਰ ਉਹ ਸਭ ਨਾਲ ਜੁੜਿਆ ਹੋਇਆ ਉਹ ਤੇ ਇਕੱਲਾ ਸਭ ਭਾਸ਼ਾ ਹੈ ਜਾ ਕੇ ਇਕੱਲਾ ਅਈ ਤੋ ਕੇ ਲੈ ਜਲੇ ਅੱਗੇ ਹੰਸ ਫਿਰ ਜਲੇ ਨਹੀਂ ਆ ਵੀ ਗਿਆ ਜੇ ਅਕੇਲਾ ਜਿੰਦਗਾ ਖੇលਿਆ ਅਕੇਲਾ ਜੇ ਤੋ ਫਾਇਦਿਲ ਸਰਬਿਆਤੀ ਗਿਆ ਉਹਦਾ ਸ਼ਬਦ ਵੀ ਸਮਾਇਆ ਕੋਲ ਸ਼ਬਦ ਉਹਦਾ ਮੁਦਦ ਦੇ ਛਲਾ ਮੁਦਦ ਨੂੰ ਬਨੇ ਬੈਠਾ ਅਦੇ ਕਿਆ ਨਾ ਖੇਲਾ ਕਾਸ਼ਾ ਲੋਕਾਂ ਤੇ ਆਇਆ ਵੀ ਤੁਸੀਂ ਅਕੇਲਾ ਕਹਿੰਦੇ ਹੋ ਅਕੇਲਾ ਅਜੀਬ ਬੜੀ ਮੁਸ਼ਕਲ ਹੁੰਦੀ ਹੈ ਉਹ ਤਾਂ ਫਿਰ ਸਹੀ ਹੈ ਲੈ ਚਲੋ ਅਕੇਲਾ ਕਹੇ ਜੀ ਮੰਨਣ ਹੈ ਉਹ ਕੇ ਉਹਨੂੰ ਨਾ ਆਪੇ ਪਤਾ ਲੱਗੂ ਹਾਂ ਜਾਂ ਕਰੀਏ ਤਾਂ ਸੋਖਾਈ ਸੀ ਅਕੇਲਾ ਨੂੰ ਲੱਗੂ ਸੀ ਜਾਣ ਆ ਗਿਆ ਹਮੇ ਪਤਾ ਲੱਗੂ ਇਹ ਹਾਲੇ ਕਹਨੂੰ ਕਹੇ ਵੀ ਅਕੇਲਾ ਨਹੀਂ ਹੁੰਦਾ ਭਈ ਇਹ ਪੜੋ ਤੇ ਝੇਲਾ ਹੁੰਦੇ ਨਾਲ ਹੋਵੇ ਅਰੇ ਕਹਿੰਦਾ ਦੋ ਆਦਮੀ ਕਾ ਚਾਈ ਦੀ ਦਰ ਚਲੋ ਬੰਦੇ ਦਾ ਸਾਇਕ ਲੈ ਦੋਆਈਲਾ ਹਲ ਵਿੱਚ ਚਮਚਾ ਕਰੇ ਲਾਲ ਜੀ ਨੂੰ ਉਠਾ ਦੇ ਸਾਜ ਜਿਸੇ ਹਿਲਾ ਜੈ ਮਾਰਗ ਇਹ ਜੱਟ ਅਕੇਲਾ ਹਰ ਨਾਮ ਸੰਗ ਕੋਤਸ ਰਹੇਗਾ ਉਹ ਤੇ ਆਹ ਬਲ ਐਸਾ ਨਾਮ ਮਨਸਾਹ ਇਹ ਤਾਂ ਨਹੀਂ ਛੱਡਣ ਵਾਲੀ ਦੀ ਗੱਲ ਹੈ ਜੇ ਮਾਰ ਕੇ ਜਾ ਤਾ ਖੇਲਾ ਕੇ ਜੇ ਜਿਨੇ ਮਾਰ ਕੇ ਜਾ ਤਾ ਖੇਲਾ ਹਾਂ ਨਹੀਂ ਛੱਡ ਕੇ ਬਾਅਦ ਉਹ ਕਹਿੰਦਾ ਉਹ ਬੈ ਜਾਵੇ ਉਹ ਪਿਆਰ ਉਹ ਰੱਜੀਵ ਕਰੂੰ ਆਇਆ ਨਹੀਂ ਹੋਇਆ ਉਸੇ ਹੋ ਗਏ जय जप आ ये दर के कहने को और ना अह दस पाला करने में पाशा करे जय जय जय सुर लोक सुभान अल्लाह जय जय का करने ऊपर करते ने आदर होता जय महावत ਤੁਹਾਡਾ ਲਾਇਕ ਹੋਣੀ ਜਾਂ ਜਾਂਦੀ ਹੈ ਆਈ ਪਰਖ ਹੈ ਦੁਹਾਂ ਦੇ ਵਿੱਚ ਉਹ ਬਚਾਣ ਲੱਗੇ ਨਾ ਗਾਇਬ ਉਹ ਨਹੀਂ ਤੇ ਪੱਲੇ ਪਾਸਾਂ ਦੇ ਕਿਵੇਂ ਨੇ ਉਲੇ ਪਾਸਾਂ ਦੇ ਕੀ ਸੋਚਦੇ ਇਹ ਆਪਣੇ ਦੇਸ਼ੀ ਕੋਣ ਨਾਲ ਸੋਚਦੇ ਨੇ ਹੈ ਕੁਝ ਹੋਰ ਜੋ ਸੀ ਸੋਚਦੇ ਹੋ ਹੈ ਵੀ ਕਾਹ ਉਹ ਕਿਸ ਨੇ ਦੱਸਿਆ ਤੂੰ ਸਮਝਾਇਆ ਦੀ ਦਿਖਾਇਆ ਦੀ ਜਦੋਂ ਕੋਈ ਬੇਹਿਸਾਬ ਨਾ ਸਮਝਦਾ ਸਮਝ ਲੈ ਲੈ ਸਰ ਫੇਰ ਉਹ ਕੁਝ ਕੁਝ ਤੋਂ ਬੁੱਣਨ ਲੱਗੇ ਜਾਂਦਾ ਬਾਕੀ ਫਿਰ ਭੁੱਜਣ ਵਾਲੀ ਗੱਲ ਤਾਂ ਪ੍ਰੈਕਟੀਕਲ ਤੇ ਹੀ ਹੈ ਜਦੋਂ ਨਾਲ ਕਹਾਂ ਬਾਪਸ ਪੀਏ ਭੁੱਜਣਾ ਤਾਂ ਉਹ ਦੋ ਜੀ ਅਸਲ ਤੇ ਬੋਟੀਆਂ ਕਰਾਂਦੇ ਨੇ ਸੁੜੀਆਂ ਹੋਈਆਂ ਨੇ ਕਿੱਡੀ ਸੁੜੀ ਹੈ ਕਿੱਡੀ ਗੈਰੀ ਚਾ ਤੁਸੀਂ ਉਹ ਜਗ੍ਹਾ ਤੇ ਪਹੁੰਚੋਵੇਂ ਸੁੜੀਆਂ ਨਹੀਂ ਨਾ ਗੱਲਾਂ ਤਾਂ ਬੱਕਰਾ ਬਹੁਤ ਕੁਝ ਹੋਵੇ ਤੁਸੀਂ ਕਦੇ ਚਲੇ ਜਾਓ ਜਾਣ ਐਂ ਨਹੀਂ ਚਲੇ ਜਾਓ ਚਲੋ ਤੁਸੀਂ ਤਾਂ ਵੀ ਵਾਰ ਘਾਹ ਕੋਈ ਗਿਆ ਦੀ ਤੂੰ ਜਿੰਨੀ ਮਰਜ਼ੀ ਰੋਲ ਕਹਿੰਦੀ ਆਂ ਤੇ ਸੁਣਾਈ ਜਾ ਜਾਂ ਜਾ ਕੇ ਹੋ ਜੇ ਉਹਨੇ ਪਹਾੜ ਹੈ ਪਰ ਜਦ ਤੂੰ ਜਿੱਦਾ ਉਹ ਆ ਹੋਰ ਐਸਾ ਤਾਂ ਫੰਕਰ ਹੋਊਏ ਇਹਦਾ ਇਹ ਜਿਹੜਾ ਉਹ ਹੀ ਕੁੱਝ ਨਾਲੀ ਗੱਲ ਆ ਉਹਦੋਂ ਵਜਲ ਕਰ ਗਿਆ ਕੱਤੀ ਸੋਣਾ ਰੱਖੀ ਦੇਖਣ ਦਾ ਖਰਚਾ ਨਹੀਂ ਉਹ ਹੀ ਕੁੱਝ ਨਾਲਾ ਕੋਈ ਵੀ ਹੱਥ ਬੰਨ੍ਹਿਆ ਹੋਇਆ ਚ ਅਖੀਰ ਤੱਕ ਭਜਾਰ ਤੋਂ ਹੀ ਬੰਨ੍ਹਿਆ ਹੋਇਆ ਚ ਅੱਖੀਂ ਦੇਖ ਕੇ ਕੰਦੀ ਸੁਣੇ ਦਾ ਫਰਕ ਹੋ ਜਾਂਦਾ ਵਾਹ ਜੈ ਮਾਰ ਕੇ ਜਤ ਅਟੇਲਾ ਹਰ ਨਾਮ ਸੰਗ ਹੋਤ ਸਹਿਲਾ ਐ ਹਰ ਨਾਮ ਸੰਗ ਦਾ ਨਾਮ ਹਾਂ ਐਸਾ ਨਾਮ ਮਨਸਵਰਪਈਆ ਨਾਨਕ ਨੂੰ ਗੁਰੂ ਕ੍ਰਿਪਾ ਹੋਰ ਆਪਾਂ ਇੱਥੇ ਕਰਦੇ ਜਿਵੇਂ ਆਪਣੀ ਗੱਲ ਕੋਈ ਬੈਠਾ ਚਲੇ ਜਾਂਦਾ ਬਾਹਰ ਚਲੇਗਾ ਉਹ ਸਵੇਰੇ ਸਵੇਰੇ ਸੁਣੋਗੇ ਕਹਿੰਦਾ ਉਹ ਕਹਿੰਦੇ ਵੀ ਰਾਜਗਾਂਦ ਰੁਕੀ ਅਗੇ ਉਹ ਤਾਂ ਹੀ ਬਸਾਫਰਾ ਨਹੀਂ ਕਹਿੰਦਾ ਵੀ ਬੈਠਾ ਕਹਿੰਦਾ ਭਈ ਇਹਦਾ ਆ ਰਹੋ ਆਪ ਕੋ ਫੇਰ ਹੀ ਪ੍ਰੋਗਰਾਮ ਆ ਦੇ ਉਹ ਕਦੇ ਚਲੇਗਾ ਨਾਲ ਹੀ ਵਰਦੇ ਸੀ ਉਹ ਕਿਸੇ ਦੇ ਗਲ ਤੋਂ ਦੋਣ ਲਾ ਗਿਆ ਕੋਮਣ ਬੋਟੀ ਫੇਖ ਵਾਲੀ ਹੋਊਗੀ ਸਿੱਖਣਾ ਨਹੀਂ ਬਾਕੀ ਹੋ ਗਿਆ ਆਹ ਭਾਰਾ ਜਾ ਹੋ ਗਿਆ ਹੋ ਗਿਆ ਤਾਂ ਦੇ ਕੇ ਅਹ ਤਾਂ ਤੋਂ ਸਮਝ ਆਉ ਬੈਠੇ ਉਹ ਪਤਾ ਹੀ ਨਹੀਂ ਖਾਧੀ ਲੈਂਦਾ ਉਹਦੇ ਕਿਦਾਂ ਬੋਲਿਆ ਉਹਨਾਂ ਦੇ ਲੋਕਾਂ ਕੋਲ ਦਵਾਈ ਹੋਣੀ ਨਹੀਂ ਸੀ ਤੇ ਉੱਥੇ ਬੂਟੀ ਵਾਦੀ ਬੱਟ ਕੇ ਦੇਤੀ ਕੋਈ ਉਹ ਠੀਕ ਹੋ ਗਿਆ ਉਹਦਾ ਭਾਈ ਦੁੱਧ ਦਿੰਦੇ ਤੇ ਇਥੇ ਰਹਿਣ ਘਰੋਂ ਕਿ ਤੁਸੀਂ ਕਿੱਥੋਂ ਆਏ ਹੋ ਉਹ ਗੱਲ ਉਹਦਾ ਲੋਕ ਸੀ ਜਿਹੜਾ ਉਹਦਾ ਗੁੱਡ ਸੀ ਉਹਦੇ ਪੂਰ ਸੀ ਕੋਈ ਕਹੇ ਜੇ ਜੇ ਜੇ ਜੇ ਜੇ ਜੇ ਜੇ ਜੇ ਜੇ ਜੇ ਜੇ ਜੇ ਜੇ ਜੇ ਜੇ ਇਹ ਤਾਂ ਦੁਨੀਆ ਦੀ ਗੋਲਗੀ ਦਾ ਇਸਹਿਲਾ ਜੇ ਨਾਲ ਕੋਲ ਹੋਵੇ ਉਹ ਕਹਿੰਦਾ ਵੀ ਇਹ ਤਾਂ ਬੜੀ ਗੱਲ ਹੈ ਉਹ ਕਹਿੰਦਾ ਨਾ ਦੁਨੀਆ ਤਾਂ ਵੱਡੀ ਗੱਲ ਹੈ ਤੁਹਾਡੀ ਤਾਂ ਉਹ ਸਾਡਾ ਜਿਹੜਾ ਕੋ ਮੁੰਡੇ ਜਿਹਾ ਗੋਣਾ ਸਾਨੂੰ ਇਹ ਸਾਨੂੰ ਬੜਾ ਇਹਦਾ ਹੈਗਾ ਵੀ ਕਿ ਸਾਡਾ ਵੀ ਆਦਮੀ ਹੋਣ ਕੋ ਖਾਦੀ ਕਰਦਾ ਸਮਝਦੇ ਨਹੀਂ ऐसा नाम मन ना सदा भइया दानक गुरुमुख परम उत्गत पाई है हां ऐसा लोग ऐसा ऐसा नाम है इसका ना कोई नाम और प्रकार नहीं है के? पर चलो तो ऐसा कराओ नहीं तो ऐसा भाई ਕਿਸੇ ਵੀ ਦਿਨ ਮਰ ਤੁਮ ਬੜ ਜਾਏ ਕਿਸੇ ਵੀ ਬੰਦੇ ਤੋਂ ਮਰ ਜਾਏ ਕਿਸੇ ਬੰਦਾ ਤਾਂ ਪਰ ਧਿਆਨ ਰੱਖਣਾ ਚਾਹੀਦਾ ਕਿ ਤੁਸੋਂ ਮਰਦਾ ਲੈ ਲਵੇ ਕਿ ਆ ਇਹ ਨਾਲ ਲੱਗ ਉਹ ਨਾਲ ਦੇ ਪਰਮੇ ਸੇ ਪਰਮੇ ਰਹੇ ਤਾਂ ਫਰਮਤੀ ਜਲਦੀ ਰਹਿੰਦੀ ਹੈ ਉਹ ਕੇ ਘਣ ਬੋਤੈ ਜਾਂਦਾ ਬੋਤੈ ਜਾਂਦਾ ਜੇ ਜੀ ਮਤ ਲੈਤਾ ਰੂ ਬੋਲ